ਮੈਂ ਬਲ ਹਾਰਸ ਸਿੱਖਾ ਤੇਥੋਂ ਜਿਹੜੀ ਕਾਰ ਕਮਾਈ ਜਾਂਦਾ ਐ ਇੱਥੇ ਉੱਥੇ ਦੁਈ ਜਹਾਨੀ ਜੀਵਨ ਸਫਲ ਬਣਾਈ ਜਾਂਦਾ ਐ ਭਾਈ ਕਨਈਆ ਇਹ ਗੱਲ ਦੱਸ ਭਈ ਤੂੰ ਇਹ ਸਿੱਖਿਆ ਕਿੱਥੋਂ ਲਈ ਐ ਉਹ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਇਹ ਸਿੱਖਿਆ ਗੁਰੂ ਤੇਗ ਬਹਾਦਰ ਜੀ ਦੇ ਇੱਕ ਸ਼ਲੋਕ ਤੋਂ ਲਈ ਐ ਮੈਂ ਗੁਰੂ ਤੇਗ ਬਹਾਦਰ ਜੀ ਦਾ ਇੱਕ ਸ਼ਲੋਕ ਸਰਵਣ ਕੀਤਾ ਸੀ ਉਹ ਸ਼ਲੋਕ ਇਹ ਸੀ ਕਿ ਘਟ ਘਟ ਮੈਂ ਹਰ ਜੂ ਬਸਿਆ ਕਹਿਓ ਪੁਕਾਰ ਮੈਂ ਸੁਣਿਆ ਸੀ ਕਿ ਘਟ-ਘਟ ਵਿੱਚ ਰੱਬ ਵਸਦਾ ਹੈ ਤੂੰ ਕਣ-ਕਣ ਵਿੱਚ ਵਸਦਾ ਮੈਂ ਤੇ ਇਸ ਪੱਖੋਂ ਉਸ ਇੱਕ ਸ਼ਲੋਕ ਨੇ ਮੇੜਾ ਬੇੜਾ ਪਾਰ ਕਰ ਦਿੱਤਾ ਮੈਂ ਅਰਜ ਕਰਾਂ ਗੁਰੂ ਕੀ ਸਿੱਖਿਆ ਵਿੱਚ ਬੜਾ ਖੁਸ਼ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਤੁਸੀਂ ਰੋਜ਼ ਪਾਠ ਕਰਦੇ ਹੋ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਬਾਣਕ ਕਦੋਂ ਜੇ ਇੱਕ ਗੁਰ ਕੀ ਸਿੱਖ ਸੁਣੀ ਜਦੋਂ ਇੱਕ ਵਾਰੀ ਕਿਤੇ ਸਤਿਗੁਰੂ ਤੋਂ ਸਿੱਖਿਆ ਸੁਣ ਲੈ ਸਿੱਖ ਤੇ ਉੱਥੇ ਰਤਨ ਜਵਾਹਰ ਤੇ ਮਾਣਕ ਆ ਜਾਂਦੇ ਨੇ ਪਰ ਇਹ ਤੇ ਸਾਰੇ ਪੱਥਰ ਦੇ ਹੁੰਦੇ ਨੇ ਜਵਾਹਰ ਲਾਲ ਨੀਲਮ ਰਤਨ ਇਹ ਸਾਰੇ ਪੱਥਰ ਨੇ 파ਰਸ ਇਹ ਸਾਰੇ ਪੱਥਰ ਨੇ ਕਿਤੇ ਇਹ ਪੱਥਰ ਨਾ ਸਮਝ ਲੈਣਾ ਕਿ ਇਹ ਜਵਾਹਰ ਮਾਣਕ ਆਉਂਦੇ ਨੇ ਇੱਥੇ ਜਵਾਹਰ ਮਾਣਕ ਤੋਂ ਭਾਵ ਹੈ ਦੇਵੀ ਗੁਣ ਸਤਿਗੁਰਾਂ ਦੀ ਸਿੱਖਿਆ ਦੇ ਵਿੱਚ ਦੇਵੀ ਗੁਣ ਭਰੇ ਹੋਏ ਹੁੰਦੇ ਨੇ ਗੁਰਸਿੱਖ ਦੇ ਅੰਦਰ ਦੇਵੀ ਗੁਣ ਆ ਜਾਂਦੇ ਨੇ ਉਦੋਂ ਜਦੋਂ ਗੁਰੂ ਤੋਂ ਸਿੱਖਿਆ ਸਰਵਣ ਕਰਦਾ ਮਨੁੱਖ ਗੁਰਸਿੱਖ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰਕੀ ਕੀ ਸਿੱਖ ਸੁਣੀ ਇੱਕ ਹੋਰ ਪਾਠ ਆਉਂਦਾ ਪਰਬਤੀ ਵਿੱਚ ਗੁਰ ਗੋਰੀ ਉਪਦੇਸ਼ ਜਵਾਹਰ ਮਾਨਕ ਸੇਵੇ ਸਿੱਖ ਸੋ ਖੋਜ ਲੈ ਗੁਰੂ ਕੇ ਉਪਦੇਸ਼ ਦੇ ਅੰਦਰ ਜਵਾਹਰ ਤੇ ਮਾਨਕ ਨੇ ਭਾਵ दैवी ਗੁਣ ਨੇ ਕਿਤੇ ਇਹ ਦੁਨੀਆ ਦੇ ਮਾਨਕ ਜਵਾਰ ਨਾ ਸਮਝ ਲੈਣਾ ਇਹ ਸਾਰੇ ਪੱਥਰ ਨੇ ਤੇ ਕਿਸੇ ਕੰਮ ਹੀ ਨਹੀਂ ਆਉਂਦੇ ਜਦੋਂ ਇੱਥੇ ਗੁਰਸਿੱਖ ਦੀ ਬਿਰਤੀ ਪਹੁੰਚ ਜਾਂਦੀ ਹੈ ਤੇ ਸੰਸਾਰੀ ਪਦਾਰਥ ਸਾਰੇ ਥੱਲੇ ਰਹਿ ਜਾਂਦੇ ਨੇ ਉਹ ਸੰਸਾਰ ਪਦਰ ਤੋਂ ਉੱਚਾ ਹੋ ਜਾਂਦਾ ਮੈਂ ਅਰਜ ਕਰ ਰਿਹਾ ਸਾਂ ਭਾਈ ਕਨਈਆ ਕਹਿੰਦਾ ਪਾਤਸ਼ਾਹ ਮੈਂ ਇੱਕ ਸ਼ਲੋਕ ਸਰਵਣ ਕੀਤਾ ਸੀ ਧਿਆਨ ਰੱਖਣਾ ਹੁਣ ਇੱਕ ਸ਼ਲੋਕ ਸਰਵਣ ਕਰਕੇ ਵੀ ਜੀਵਨ ਸੁਧਰ ਸਕਦਾ ਤੇ ਅਸੀਂ ਹਜ਼ਾਰਾਂ ਹੀ ਸ਼ਬਦ ਸੁਣਨੇ ਆ ਇੱਥੇ ਵਾ ਵਾ ਵਾ ਵਾ ਕਰਕੇ ਚਲੇ ਜਾਣਾ ਉਹ ਬਾਹਰ ਜਾਂਦੇ ਨਿਕਲ ਜਾਂਦੇ ਨੇ ਸਾਰੇ ਚਿੰਤਾ ਰਹਿਣਾ ਹੀ ਕੋਈ ਨਹੀਂ ਮੈਂ ਅਰਜ ਕਰਾਂਗਾ ਕਿ ਸਤਗੁਰਾਂ ਦਾ ਉਪਦੇਸ਼ ਜਿਹੜਾ ਵਿਦਕ ਹੁੰਦਾ ਇਹਦੇ ਨਾਲ ਤੇ ਮਨੁੱਖ ਨੂੰ ਐਸਾ ਹੋ ਜਾਂਦਾ ਜਿਸ ਤਰ੍ਹਾਂ ਪਾਣੀ ਪਾਣੀ ਹੁੰਦਾ ਸੋ ਭਾਈ ਕਨਈਆ ਮੈਂ ਕਥਾ ਸਮਾਪਤ ਕਰਾਂ ਕਹਿੰਦਾ ਮਹਾਰਾਜ ਸ਼ਲੋਕ ਸਰਵਣ ਕੀਤਾ ਸੀ ਜਿਸ ਵੇਲੇ ਇਹ ਗੱਲ ਆਖੀ ਕਹਿੰਦੇ ਨੇ ਸਿੱਖ ਨੂੰ ਛਾਤੀ ਨਾਲ ਲਗਾਇਆ ਸੇਵਾ ਵੇਖ ਆਲੂ ਸਤਗੁਰ ਮੁੱਖੋਂ ਏਦਾਂ ਬਚਨ ਸੁਣਾਇਆ ਮੈਂ ਬਲਹਾਰੇ ਸਿੱਖਾ ਤਿੱਥੋਂ ਜੋ ਤੂੰ ਕਾਰ ਕਮਾਈ ਜਾਨਾ ਇੱਥੇ ਉੱਥੇ ਦੋਹੀ ਜਹਾਨੀ ਜੀਵਨ ਸਫਲ ਬਣਾਈ ਜਾਨਾ ਕਹਿੰਦੇ ਨੇ ਤੇਰੇ ਜੈਸਾ ਦੁਨੀਆਂ ਉੱਤੇ ਹੋਰ ਨਾ ਕੋਈ ਸੂਰਾ ਹੋਣਾ ਜੋ ਵਰ ਮੂੰਹੋਂ ਕੱਢੇਗਾ ਤੂੰ ਸਿੱਖਾ ਤੇਰਾ ਪੂਰਾ ਹੋਣਾ ਓ ਭਾਈ ਕਨਿਆ ਤੂੰ ਤ੍ਰਕਾਲ ਬਣ ਗਿਆ ਜੋ ਤੇਰੀ ਜ਼ਬਾਨ ਤੋਂ ਵਾਕ ਨਿਕਲੇਗਾ ਸੱਚ ਹੋਵੇਗਾ ਤੇਰਾ ਪੰਥ ਚੱਲੇਗਾ ਦੁਨੀਆਂ ਵਿੱਚ ਅੱਜ ਤੱਕ ਇਹ ਚੱਲਦਾ ਪਿਆ ਭਾਈਕੋ ਸੇਵਾ ਪੰਥੀਏ ਅੱਜ ਤੱਕ ਰਹੇਗੇ ਨੇ ਹਿੰਦੁਸਤਾਨ ਵਿੱਚ ਜਗਾ ਜਗਾ ਉਹਨਾਂ ਦੇ ਢੇਰੇ ਬਣੇ ਹੋਏ ਨੇ ਉਹਨਾਂ ਦੇ ਇਸੇ ਪੀੜੀ ਦੇ ਵਿੱਚ ਇਸੇ ਗੱਦੀ ਦੇ ਉੱਤੇ ਭਾਈ ਕਨਈਏ ਤੋਂ ਅੱਗੇ ਇੱਕ ਬਹੁਤ ਪ੍ਰਤਾਪੀ ਮਹਾਤਮਾ ਹੋਏ ਨੇ ਅੱਡਣ ਉਹਨਾਂ ਦੇ ਨਾਮ ਤੋਂ ਇਹਨਾਂ ਦੀ ਸੰਗਿਆ ਅੱਡਣਸ਼ਾਈਏ ਵੀ ਹੈ ਪਰ ਬਹੁਤੇ ਸੇਵਾ ਪੰਥੀਏ ਕਹਿੰਦੇ ਨੇ ਇਹਨਾਂ ਨੂੰ ਅੱਜ ਤੱਕ ਨਾਮ ਉਸ ਸੰਪਰਦਾ ਦਾ ਸੇਵਾ ਪੰਥੀਏ ਹੈ ਭਾਈ ਕਨ੍ਹੇ ਨੇ ਸੇਵਾ ਕੀਤੀ ਹੋਈ ਆ ਅੱਜ ਤੱਕ ਸੇਵਾ ਪੰਥੀ ਨਾਮ ਆ ਰਿਹਾ ਤੇਰਾ ਪੰਥ ਚੱਲੇਗਾ ਕਹਿੰਦੇ ਨੇ ਜੋ ਵਰ ਮੂੰਹੋਂ ਕੱਢੇਗਾ ਤੂੰ ਸਿੱਖਾ ਤੇਰਾ ਪੂਰਾ ਹੋਣਾ ਜਾ ਹੁਣ ਰਣ ਭੂਮੀ ਵਿੱਚ ਜਾ ਕੇ ਪਾ ਦੁਖੀਆਂ ਦੇ ਮੂੰਹ ਵਿੱਚ ਪਾਣੀ ਤੇ ਤੂੰ ਅਮਰ ਹੈ ਸਦਾ ਰਹੇਗੀ ਜਗ ਤੇ ਤੇਰੀ ਅਮਰ ਕਹਾਣੀ ਭਾਈ ਕਨਈਆ ਤੂੰ ਅਮਰ ਹੋ ਗਿਆ ਤੇਰੀ ਅਮਰ ਕਹਾਣੀ ਐ ਸੰਸਾਰ ਵਿੱਚ ਕਥਾ ਚੱਲੇਗੀ ਲੋਕੀ ਕਥਾ ਕਰਿਆ ਕਰਨਗੇ ਅੱਜ ਤੱਕਰ ਕਰਦੇ ਨੇ ਮੈਂ ਅਰਜ ਕਰ ਰਿਹਾ ਸਾਂ ਸਤਗੁਰਾਂ ਦੇ ਉਪਦੇਸ਼ ਸਰਵਣ ਕਰਨ ਤੋਂ ਇੰਨਾ ਕੁਝ ਹੋ ਸਕਦਾ ਐ ਇਸ ਵਾਸਤੇ ਕਬੀਰ ਕਹਿੰਦੇ ਨੇ ਇਹ ਜੜੀਆਂ ਦੁਨਿਆਵੀ ਬਿਮਾਰੀਆਂ ਨੇ ਜਿਹੜੀਆਂ ਮਨੁੱਖ ਨੂੰ ਮਨੁੱਖ ਦਾ ਤਨ ਗਰਮ ਕਰ ਦਿੰਦੀਆਂ ਨੇ ਤਨ ਤਾਪ ਤਨ ਤਾਪ ਤੋਂ ਭਾਵ ਐ ਸਰੀਰ ਨੂੰ ਗਰਮ ਕਰਨ ਵਾਲੀਆਂ ਸ਼ਕਤੀਆਂ ਇਹ ਹੈ ਤ੍ਰਿਸ਼ਨਾ ਅਗਨੀ ਹੋ ਮੈ ਅਗਨੀ, ਕਰੋਧ ਅਗਨੀ ਤੇ ਈਰਖਾ ਅਗਨੀ ਇਹ ਚਾਰ ਅਗਨੀਆਂ ਨੇ ਸਾਡੇ ਕੋਲ ਅੰਦਰ ਦਿੱਤੀਆਂ ਨੇ ਹੈਗੀਆਂ ਨੇ ਜਿੰਨਾ ਚਿਰ ਇਹਨਾਂ ਤੇ ਕੰਟਰੋਲ ਨਾ ਹੋਵੇਗਾ ਉਹਨਾਂ ਚਿਰ ਗੁਰੂ ਦਾ ਉਪਦੇਸ਼ ਅਸਰ ਨਹੀਂ ਕਰੇਗਾ ਇਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਬਾਂਸ বাজਾਈਏ ਫੂਕ ਸੋ ਇਸ ਤਰ੍ਹਾਂ ਨਾ ਬਣੀਏ ਹਮੇਸ਼ਾ ਤੁਸੀਂ ਸਰਵਣ ਕਰਦੇ ਹੋ ਸਤਿਗੁਰੂ ਦਾ ਉਪਦੇਸ਼ ਸਰਵਣ ਕਰਕੇ ਜੀਵਨ ਸਫਲ ਕਰੋ ਆਪਣਾ ਜਿਹੜੇ ਵੀ ਸੱਜਣ ਇੱਥੇ ਆਏ ਹੋਏ ਨੇ ਦਵਾਨ ਭਰਿਆ ਹੋਇਆ ਜਿਨ੍ਹਾਂ ਨੇ ਭਜਨ ਨਹੀਂ ਪੁੱਛਿਆ ਹੋਇਆ ਇੱਥੇ ਆਣ ਕੇ ਭਜਨ ਪੁੱਛ ਲਿਆ ਕਰਨ ਜਿਨ੍ਹਾਂ ਬੱਚਿਆਂ ਨੇ ਮਾਈਆਂ ਨੇ ਭਾਈਆਂ ਨੇ ਨਾ ਪੁੱਛਿਆ ਹੋਵੇ ਭਜਨ ਪੁੱਛ ਕੇ ਆਪਣਾ ਜਨਮ ਸਫਲਾ ਕਰਿਆ ਕਰੋ ਸੱਚੇ ਪਾਤਸ਼ਾਹ ਇੱਥੇ ਕੁਦਰਤੀ ਕਦੇ-ਕਦੇ ਆਉਂਦੇ ਨੇ ਦਰਸ਼ਨ ਦਿੰਦੇ ਨੇ ਸੋ ਇਹ ਕੁਛ ਕਰਕੇ ਇਸ ਤਰ੍ਹਾਂ ਦਾ ਜੀਵਨ ਬਣਾ ਕੇ ਆਪਣਾ ਸੀ ਜੀਵਨ ਸਫਲ ਕਰੀਏ ਮੈਂ ਇਹ ਕੁਛ ਕਹਿੰਦਾ ਖਿਮਾ ਦਾ ਜਾਚਕਾ ਸਤਿ ਸ੍ਰੀ ਅਕਾਲ